हां जाकी लीला की जित नाही जाकी लीला की जित नाही जीवी लीला है और रचना ही लीला होगी ए प्रपंचा जेड़ा इणो परपंच गया सारी सृष्टि नु सृष्टि दे विच दखल देना कोई सृष्टि दे भले वास्ते रचना यही प्रपंचा बड़े-बड़े लंगर चलावणे इत्ते बड़े-बड़े हॉस्पिटल खोल बड़े-बड़े कॉलेज खोल ले पर परपंच है ये सारा परपंच ये परपंच पारब्रह्म की लीला सारे परपंच है ये मिथ्या है सारा ही परपंच होता ही मिथ्या है जो कूड़ राजा कूड़ प्रजा सब संसार संसार मिथ्या है ये तो परपंच भी संसार है, है। ਪਰ ਪੰਜ ਦਾ ਬਾਹ ਨਿਕਲਣਾ ਪਰ ਪੰਜ ਦਾ ਬਾਹ ਨਿਕਲਣਾ ਪਰ ਪੰਜ ਨੂੰ ਪਰਪੰਚ ਮੰਦਗੀ ਚੱਲਣਾ ਹੈ। ਜਾਕੀ ਲੀਲਾ ਕੀ ਮਤਨਾ ਹੈ? ਜਾਕੀ ਲੀਲਾ ਕੀ ਮਤਨਾ ਹੈ ਜਿਹਦੀ ਲੀਲਾ ਹੈ ਨਾ ਜਿਹੜੀ ਇਹ ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਸੀ। ਠੀਕ ਹੈ। ਲੀਲਾ ਵਾਰੇ ਅੰਦਾਜ਼ਾ ਨਹੀਂ ਲੱਗ ਸਕਦਾ। ਸਾਰੇ ਦੇਵ ਹਾਰੇ ਸਾਰੇ ਦੇਵਤੇ ਹਾਰ ਗਏ ਦਚ pero me to jaan nahi aa aho दे, graanth likhe paye ne koi koi yo jhotas de koi yo koi yo baisera e bhaj puchle e da nahi pata lagya sagar dev hare hare dev dev te is ulte ra paye hoye the ulte ra ਇਹ ਫਿਰ ਦੇਖ ਲੋ ਤੇ ਇਹ ਤਾਂ ਕੀ ਲੱਭੂ ਕਾ ਖੜੀ ਲੱਭਣਾ ਕੋਈ ਲਾਭ ਨਹੀਂ ਹੋਣਾ ਨੁਕਸਾਨ ਨੁਕਸਾਨ ਹੋਣਾ ਜਿੰਨਾ ਪੈਸਾ ਖਰਚ ਕਰਦੇ ਨੇ ਇਹ ਉਹਦਾ ਨੁਕਸਾਨ ਹੋਣਾ ਫਾਇਦਾ ਨਹੀਂ ਹੋਣਾ ਦੁਨੀਆ ਨੂੰ ਨੁਕਸਾਨ ਹੋਇਆ ਹੋਇਆ ਜੋ ਐਸਾ ਚਾਹੀਦਾ ਉਹ ਰੋਕ ਕੇ ਇਹ ਜਿਹਾ ਕੰਮ ਕਰਨਾ ਕੋਈ ਫਾਇਦਾ ਨਹੀਂ ਇਹ ਟੈਕਨੀਕ ਇਹਨਾਂ ਨੁਕਸਾਨ ਕਰਦਾ ਹਾਂ ਪਿਤਾ ਦਾ ਜਨਮ ਕੀ ਜਾਣੇ ਪੁੱਤ ਫਗਲ ਪਰੋਈ ਆਪਣਾ ਟੂਟ ਪਿਤਾ ਦਾ ਜਨਮ ਕੀ ਜਾਣੇ ਪੁੱਤ ਜਿਵੇਂ ਪਿਤਾ ਦਾ ਜਨਮ ਨੂੰ ਪੁੱਤਰ ਜਾਂਦਾ ਹੁੰਦਾ ਨਹੀਂ ਜਾਣਦਾ ਉਹ ਤਾਂ ਬਾਅਦ ਹੀ ਪਤਾ ਹੁਆ ਤੁਸੀਂ ਕੀ ਜਾਣੋ ਕਿ ਸ੍ਰਿਸ਼ਟੀ ਕਦੋਂ ਪੈਦਾ ਹੋਈ ਸੀ 84 ਲੱਖ ਜੂਨ ਦੇ ਵਿੱਚ ਆਦਮੀ ਅਸਰਪ ਜਿਹੜਾ ਜਾਣਨ ਦੀ ਕੋਸ਼ਿਸ਼ ਕਰਦਾ ਹੈ ਲੱਖ ਜੂਨ 84 ਲੱਖ ਇਹ ਤਾਂ ਪਹਿਲਾਂ ਹੋ ਚੁੱਕਿਆ ਅਜੀਬ ਦਾ 84 ਲੱਖ ਜੂਨ ਪਹਿਲਾਂ ਤੋਂ ਉੱਤ ਚੁੱਕਿਆ ਹੈ लास्ट ਵਾਲੀ ਜੂਨ ਇਹ ਹੈ ਤੇ ਹੁਣ ਕਿਹੜਾ ਇਹਨੂੰ ਤਾਂ ਆਪਣੇ ਦਾਪਦਾ ਨਹੀਂ ਪਤਾ ਪਿੱਛੇ ਦਾ ਵੀ ਪਤਾ ਹਰ ਜੂਨ ਚ ਇਹਦਾ ਆਪ ਮਾਣ ਸੀ ਕਿੱਥੇ ਤੱਕ ਜਾ ਕੇ ਕਿਵੇਂ ਪਤਾ ਲਗੂਗਾ ਕਿੱਥੋਂ ਚੱਲ ਕੇ ਆਏ ਆ ਕਿੰਨੇ ਵੜ ਗਏ ਆ ਥੱਲੇ ਕਿੰਨੀ ਵਾਰ ਤੇ ਚੜੇ ਆ ਫਿਰ ਲੈਣਾ ਵੀ ਕੀ ਅਸਲ ਤੇ ਸੀ ਸੌਲ ਤਾਂ ਹੈ ਅਭੀ ਹੁਣ ਅਸੀਂ ਪੌੜੀ ਦੇ ਨੇੜੇ ਖੜਿਆ ਅੰਦਰ ਵੜਨਾ ਕਰ ਹੁਣ ਤੱਕ ਦੀ ਲੜਾਈ ਜਿਹੜੀ ਲੜੀ ਆ ਆ ਸਬਰ ਕੀਤਾ ਸਿਰਫ ਆਪਣੇ ਘਰ ਪਹੁੰਚਣ ਵਾਸਤੇ ਕੀਤਾ ਹੁਣ ਆਪਾਂ ਆਖਰੀ ਪੌੜੀ ਦੇਖ ਲੈਣਾ ਘਰ ਪੜਨਾ ਜਿਹੜਾ ਪਿਛੇ ਨੂੰ ਜਾਣਾ ਹੈ ਅੰਤ ਜਾਣਾ ਜਾਣਣਾ ਮਾਇਆ ਦਾ ਸਾਰਾ ਕੁਝ ਜਾਨਣਾ ਉਹਦਾ ਫਾਇਦਾ ਕੀ ਆਊਗਾ ਉੱਥੇ ਫਸ ਕੇ ਦੇਵਤੇ ਸਗਲ ਦੇਰ ਦੇਵ ਹਰੇ ਹਰ ਰਾਗੇ ਅਬ ਕਾਹ ਹੈ ਸਿਤਾ ਕੀ ਜਨਮ ਕੀ ਜਾਣੇ ਪੁੱਤ ਸਗਲ ਪਰੋਈ ਆਪਣਾ ਪੁੱਤ ਪਿਤਾ ਕਾ ਜਨਮ ਕੀ ਜਾਣੇ ਪੁੱਤ ਸਗਲ ਪਰੋਈ ਆਪਣੇ ਸੂਤ ਜਿੱਦੀ ਵੀ ਇਹ ਆਤਮਾ ਹੈ ਇਹ ਸ੍ਰਿਸ਼ਟੀ ਹੈ ਕੀ ਜੜ ਕੀ ਤੇ ਉਹਨੇ ਆਪਣੇ ਹੁਕਮ ਚ ਆਗਿਆ ਚ ਪਰੋਈ ਹੋਈ ਹੈ ਉਹਦੀ ਆਗਿਆ ਤੋਂ ਬਾਹਰ ਨਹੀਂ ਹੈ ਨਾ ਤਾਂ ਚੰਦ ਸੂਰਜ ਨਾਮ ਆਇਆ ਨਾ ਕੁਦਰਤ ਨਾ ਜੀ ਜੰਤ ਉਹਦੀ ਆਗਿਆ ਤੋਂ ਬਾਅਦ ਆਗਿਆ ਬਿਨਾਂ ਨਹੀਂ ਕੋਈ ਉਹਦੇ ਹੁਕਮ ਜਪਰੋਏ ਹੋਏ ਨੇ ਸਾਰੇ ਹਾਂਜੀ ਸੁਮਤ ਗਿਆਨ ਇਹ ਹੈ ਸਾਰਾ ਕਿ ਸੁਮਤ ਔਰ ਗਿਆਨ ਧਿਆਨ ਜਿੰਨੂੰ ਦੇ ਦੇਵੇ ਬਖਸ਼ ਦੇਵੇ ਸੁਮਤ ਬਖਸ਼ ਦੇਵੇ ਚੰਗੀ ਮਤ ਬਿਵੇਕ ਬੁੱਧੀ ਔਰ ਗਿਆਨ ਧਿਆਨ ਸਵਾਲ ਕੀ ਹੈ ਦੇਵਤਿਆਂ ਦੀ મત ਸਮਤ ਨਹੀਂ ਸੀ ਕੋ ਮਤ ਸੀ ਉਹ ਜਿਹੜਾ ਰਚਨਾ ਦੀ ਖੋਜ ਪੈ ਗਿਆ ਉਹ ਕੁਮਤ ਹੈ ਕੁੱਠੀ ਮਤ ਜਿਹੜਾ ਆਤਮਿਕ ਖੋਜ ਦੇ ਵਿੱਚ ਪੈ ਗਿਆ ਉਹ ਸਮਤ ਹੈ ਮੈਂ ਕੰਮ ਕੀ ਆਇਆ ਹੁਣ ਮੈਂ ਕੀ ਕਰਨਾ ਹੁਣ ਕੀ ਕਰਨਾ ਪਿੱਛੇ ਜੋ ਹੋ ਗਿਆ ਹੋ ਗਿਆ ਹੁਣ ਕੀ ਕਰਨਾ ਚਾਹੀਦਾ ਇਹ ਸਮਤ ਹੈ ਪ੍ਰੈਜ਼ੈਂਟ ਦੀ ਗੱਲ ਕਰੋ ਪਿੱਛੇ ਜੋ ਹੋ ਗਿਆ ਗਲਤੀ ਹੋ ਗਈ ਹੋਗੀ ਹੁਣ ਕੀ ਕਰਨਾ ਹੁਣ ਤੇ ਹੀ ਕਰ ਲੋ ਠੀਕ ਇਸ ਮਤ ਸਮਤ ਆ ਗਏ ਕਿ ਦਾ ਵੀ ਹੁਣ ਗਾਹ ਨੂੰ ਕੀ ਕਰਨਾ ਇੱਥੇ ਆ ਜੋ ਪਿੱਛੇ ਛੱਡ ਫਿਰ ਉਹਦਾ ਸਮਤ ਦੇ ਨਾਲ ਗਿਆਨ ਦੋਵੇ ਕਰਨ ਦਾ ਗਿਆਨ ਕੀ ਕਰਨਾ ਧਿਆਨ ਧਿਆਨ ਧਿਆਨ ਉੱਥੇ ਜੋੜੇ ਫਿਰ ਹੋਰ ਕਿਤੇ ਧਿਆਨ ਨਾ ਦੋਵੇ ਜਿੱਥੇ ਪਿੱਛੇ ਧਿਆਨ ਸੀ ਜਿਹੜਾ ਤਨ ਕੀਜਾ ਮਿਲ ਗਿਆ ਸਮਤ ਗਿਆਨ ਧਿਆਨ ਮਿਲ ਗਿਆ ਚੰਦ ਤੇ ਹੱਲ ਰਹਿ ਚੀ ਉਹ ਦਾਸ ਨਾਮ ਤੇ ਧਿਆਨ ਰੱਖੂਗਾ ਬਾਕੀ ਨਹੀਂ ਰਸਦਾ ਹੋਈ ਜੇ ਇਹ ਮਤ ਬਦਲ ਜਵੇ ਕੋ ਮਤ ਤੋਂ ਸਮਤ ਆ ਜਵੇ ਦੁਨੀਆ ਸੰਸਾਰ ਨਾਲ ਜੁੜੀ ਹੋਈ ਹੈ ਸੰਸਾਰ ਨਾਲ ਤੋੜ ਲਵੇ ਸਮਤ ਹੈ ਗਿਆਨ ਧਿਆਨ ਹੋ ਜਵੇ ਅੰਤਰ ਧਿਆਨ ਹੋ ਜਵੇ ਅੰਦਰ ਦਾ ਗਿਆਨ ਹੋ ਜਵੇ ਅਧਰੋ ਬੜ ਲੈਣਾ ਬਸ ਉਹਦਾ ਹੀ ਆਪਣੇ ਨਾਮ ਦੇਣਾ ਧਿਆਨ ਰੱਖਦਾ ਬਾਕੀ ਨਹੀਂ ਰੰਦਾ ਕਿਹਦੇ ਹਾਂਜੀ ਤੇ ਹਉ ਗੁਣ ਮਹਿ ਜਾ ਕੋ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਜਿਹੜੇ ਤਿੰਨ ਗੁਣਾਂ ਚ ਭਰਮਾਏ ਰ ਦੂਏ ਪਾਸੇ ਜਿਨ੍ਹਾਂ ਜਿਨ੍ਹਾਂ ਨੇ ਕਿਹਾ ਜਿਹੜੇ ਤਿੰਨ ਗੁਣ ਵਾਲੇ ਨੇ ਇਹ ਸਰਗੋੜ ਨੇ ਉਹ ਪਰਮਾਤਮਾ ਤੇ ਗੁਣਾਂ ਚ ਪੰਡਤ ਜੋਗੀ ਬਾਕੀ ਸਾਰੀ ਦੁਨੀਆ ਤੇ ਹਉ ਗੁਣ ਮਹਿ ਜਾ ਭਰਮਾਏ ਜਨਮ ਫਿਰ ਜਨਮ ਮਰੇ ਜਨਮ ਹੋਣਾ ਫਿਰ ਆਬਾ ਉਹ ਜਨਮ ਦੇ ਬੰਦੇ ਜਾਂਦੇ ਨੇ ਫਿਰ ਆਬਾ ਜਾਂਦੇ ਉਹਦੇ ਜਾਂਦੇ ਨੇ ਕੋਈ ਜਿਹਦਾ ਨੂੰ ਪ੍ਰਭਉਂਦਾ ਬਹੁਤੇ ਨਹੀਂ ਨਾ ਹੋ ਜਨਮ ਹੋਣਾ ਜਨਮ ਹੋਣਾ ਫਿਰ ਆਬਾ ਜਾਂਦੇ ਫਿਰ ਆਬਾ ਜਾਂਦੇ ਫਿਰ ਉਹਦੇ ਜਾਂਦੇ ਨੇ ਜਿਹੜੇ ਪਰਮ ਜਾਂਦੇ ਨੇ ਹਾਂ ਉਜ ਨੀਜ ਤੇ ਕੇ ਥਾਲ ਜੈਸਾ ਜਨਾਲਾ ਹੈ ਜੈਸਾ ਨਾਮ ਤੇ ਉੱਚ ਕਦੇ ਨੀਚ ਕੰਮ ਕਰਦਾ ਕਦੇ ਕਦੇ ਹੈ ਚੰਗੇ ਕੰਮ ਕਰਦਾ ਕਦੇ ਮਾੜੇ ਕੰਮ ਕਰਦਾ ਇਹਦੇ ਹੀ ਦੋ ਸਹਾਨ ਨੇ ਤੇ ਆਤਾ ਹੈ ਬਗੈਰ ਚਲਿਆ ਜਾਂਦਾ ਪਾਪ ਦਾ ਇਹ ਤਾਂ ਹੁਕਮ ਦਾ ਵਿਰੋਧ ਕਰਦਾ ਇਹ ਨੀਚ कम ਹੁਕਮ ਭਾਣੇ ਚੱਲਦਾ ਉੱਚ ਕੰਮ ਇਹ ਦੋਹੇ ਸਹਾਨ ਨੇ ਜੀ ਇਹ ਤਾਂ ਭਾਣੇ ਚੱਲੇ ਇਹ ਆ ਪਾਣੀ ਦਾ ਵਿਰੋਧ ਕਰ ਲਵੇ ਜਿਹੜੇ ਤਿੰਨਾ ਗੋਲਾਂ 'ਚ ਪਰਮਾਇਆ ਜਾਂਦਾ ਪਾਣੀ ਦੇ ਵਿਰੋਧ ਕਰਦੇ ਨੇ ਦੋ ਪਾਣੀ ਆਲੇ ਨੇ ਇੱਕ ਭੇਜਣੇ ਤੇ ਰਹੂਣ ਤੇ ਹਾਂ ਤੇ ਤੇ ਗੋਲ ਤੇ ਪੈਣ ਨੇ ਇੱਕ ਪਰਮਾਇਆ ਹੋਏ ਨੇ ਇੱਕ ਤਿੰਨਾ ਗੋਲਾਂ ਦੇ ਉੱਪਰ ਉੱਠ ਕੇ ਅਲੱਗ ਹੋ ਕੇ ਇੱਕ ਤਿੰਨਾ ਗੋਲਾਂ ਦੇ ਪਰਮ 'ਚ ਫਸੇ ਇੱਕ ਤਿੰਨੇ ਇੱਕ ਤਿੰਨੇ ਖਾਈਆਂ 'ਚ ਫਸੇ ਹੋਏ ਨੇ ਜੈਸਾ ਜਨਾਬਾ ਹੈ ਤੈਸਾ ਨਾਮ ਜਾਣ ਜੈਸਾ ਜਨਾਬ ਗਿਆਨ ਦੇ ਰਹੇ ਜੈਸਾ ਨਾਨਕ ਨੂੰ ਗਿਆਨ ਦਿਖਾ ਰਿਹਾ ਉਸਨਾਂ ਉਸਾ ਨਾਨਕ ਉਹੀ ਨਾਨਕ ਬਿਆਨ ਕਰ ਰਿਹਾ ਜੈਸਾ ਨਾਨਕ ਉਹੀ ਨਾਨਕ ਨੇ ਜਾਣਿਆ ਉਹੀ ਦੱਸ ਰਿਹਾ ਜਾਣਕਾਰੀ ਆਪਣੀ ਜਾਣਕਾਰੀ ਉਹ ਦੱਸ ਰਿਹਾ ਹਾਂ ਨੰਨਾ ਰੂਪ ਜੋ ਹੁਕਮ ਨਾਲ ਸੋਝੀ ਆਈ ਹੈ ਜੋ ਸ਼ਬਦ ਗੁਰੂ ਨੇ ਦਿੱਤੀ ਹੈ ਸੋਝੀ ਉਹੀ ਤਾਂ ਕਹਿ ਰਿਹਾ